लोकमहल्ला पहला सर्भे जोय अगच्छमि दूघकनेरो आथ कालर लादस सर लांगणो लाभ न पुंजी साथ इना ने सब, सब कुछ त्यागता अगर चित्त उनका ਮਾਇਆ ਦੀ ਟੋਟ ਉਹਨਾਂ ਨੂੰ ਸਭ ਤੋਂ ਜ਼ਿਆਦਾ ਦੁੱਖ ਹੀ ਕਰਦੀ ਹੈ। ਅਨੁਭਵ ਤੋਂ ਮਾਇਆ ਬਲੇ ਧਿਆਨ ਰਹਿਦਾ ਲੋੜਾ ਪੂਰੀ ਨਹੀਂ ਹੁੰਦੀ। ਮਾਇਆ ਦੇ ਆਉਣ ਦਾ ਸਭ ਤੋਂ ਜ਼ਿਆਦਾ ਦੁੱਖ ਉਹਨਾਂ ਨੂੰ ਰਹਿੰਦਾ। ਕੱਲ ਲੱਗਸ ਕੱਲ ਲੱਗਣੋਂ ਕੱਲੋਂ ਕਪੜੇ ਤੋਂ ਨਾਲ। ਤੇ ਕੱਲ ਲੱਗ ਲਈਏ। ਫਿਰ ਤੇ ਹੁੰਦਾ। ਕੋਵਲ ਲੱਗ ਆਉਗੇ। ਲਾਵਨਾ ਪੂਰੀ ਸਾਡ ਉਹ ਕੱਲਰ ਤਾਂ ਲੱਦਿਆ ਹੋਇਆ ਉਹ ਕੀ ਕਰਨਾ ਵੇ ਤੂੰ ਮੈਨੂੰ ਫਿਰ ਹੋ ਕੀ ਮੈਨੂੰ ਕੱਲਰ ਦਾ ਸਿਰੋਵਰ ਲੰਘਿਆ ਉਹ ਸਿਰੋਵਰ ਦੇ ਪਾਣੀ ਬਿਨਾਂ ਤਾਂ ਕੱਲਰ ਨੇ ਕੰਮ ਨਹੀਂ ਸਾਬਣ ਦਾ ਕੰਮ ਕਰਨਾ ਸੀ ਉੱਥੇ ਆ ਆਇਆ ਚੱਲਦੀ ਸੀ ਆਇਆ ਕਰਕੇ ਤਾਂ ਇਹ ਗਿਆਨ ਪੂਰਾ ਹੋਣਾ ਤੇਰਾ ਇਹ ਜੱਗੀ ਫਿਰ ਵਾਇਆ ਤੇ ਬਿਨਾਂ ਸਰੀਰ ਤੇ ਚੱਲੂ ਤੇਰਾ ਸਰੀਰ ਤੇ ਬਿਨਾਂ ਤੇ ਯਾਦ ਕਰ ਮੈਂ ਜਲੂ ਫੇਰਾ ਪੈਦਾ ਨਾ ਸੀ ਤੇ ਖਾਂਦਾ ਹੈ ਹੈ ਨਾਮ ਕਿੱਦੋਂ ਜਪਣਾ ਉਹ ਤਾਂ ਇਹ ਵੀ ਕਲਰ ਦੀ ਕੰਨ ਸਕਤੇ ਆ ਫਿਰ ਪੈਦਾ ਹੋਇਆ ਆ ਸਰੀਰ ਕੰਡਰੇ ਕਿ ਕੀ ਤੇਰੇ ਸਰੀਰ ਅਚਾ ਸਰੀਰ ਨੂੰ ਕਹਿ ਦੀ ਕਲਰ ਲਾਦ ਸਰ ਲਾਭ ਲੈਣਾ ਸੀਗਾ ਲਾਭ ਲੈ ਹੀ ਨਹੀਂ ਤਾਂ ਕੋਈ ਇਹਦਾ ਹੀ ਕਿਰਤਾ ਨਹੀਂ ਕੋਈ ਪਾਲੀ ਦੀ ਹੈ ਅਜਾ ਕਿ ਆਗਦਾ ਸਭ ਕੁਝ ਇਹ ਉਹ ਕਹਿੰਦਾ ਕਲਰ ਕੰਨ ਕਰਫ ਜਿਹੜੇ ਕਲਰ ਦੀ ਕੰਦੇ ਹੈ ਠੀਕ ਹੈ ਪੂੰਜੀ ਸਾਚੋ ਨਾਮ ਤੂੰ ਅਖਿੱਤੋ ਦਰਬ ਅਪਾਰ ਨਾਨਕ ਵਖਰ ਨਿਰਮਲੋ ਧਨ ਸ਼ਾਹ ਵਾਪਾਰ ਆ ਪੁੱਲੀ ਜਾ ਕੇ ਨਾਮ ਤੂੰ ਉਹ ਨਾਮ ਦੀ ਪੁੱਲੀ ਕਨੋ ਜਾਈ ਦੇ ਸਕੇ ਰਾਮ ਦੀ ਪੂੰਜੀ ਕਲਰ ਲੱਦੀ ਫਿਰਦਾ ਸਰਤੇ ਅਕੌਂਡਰ ਤਰਬ ਆਪਾਰ ਬਹੁਤ ਵੱਡਾ ਖਿਆਨਾ ਆਇਆ ਨੇ ਆਪਾਰ ਮਾਇਆ ਤੋਂ ਪਰੇ ਜਾਣ ਵਾਲਾ ਤਾਨਾ ਸਰਬ ਆਪਾਰ ਨਾਨਕ ਬਕਰ ਨਿਰਮਲ ਹੋਏ ਸੌਦਾ ਨਿਰਮਲ ਨਿਰਮਲ ਮਾਇਆ ਤੋਂ ਰਹੇਤ ਗੁਲੀਦ ਤੋਂ ਰਹੇਤ ਤਾਨੋ ਸ਼ਾਹ ਵਪਾਰ ਤਾਨੋ ਸ਼ਾਹ ਜਿਹੜਾ ਇਹਦਾ ਵਪਾਰ ਕਰੇ ਤਾਨੋ ਵਪਾਰ ਹੈ ਇਹ ਜਿਹੜਾ ਨਿਰਮਲ ਦਾ ਵਪਾਰ ਕਰੇ ਕੇ ਰੋਗ ਦਾ ਵਪਾਰ ਕਰੇ ਵਪਾਰੀ ਤਾਨਾ ਠੀਕ ਹੈ ਜੀ ਮਹੱਲਾ ਪਹਿਲਾ ਉਰਵਪ੍ਰੀਤ ਪੀਰਾਨ ਲੈ ਮੇਟੋ ਠਾਕੁਰ ਮਾਨ ਮਾਥੇ ਉੱਬ ਜਮ ਮਾਰਸੀ ਨਾਨਕ ਮੇਲਨ ਨਾਮ ਅਲਾ ਦਾ ਪ੍ਰੀਤ ਕਰ ਉਹ ਤਾਂ ਉਹਦਾ ਵੱਡਾ ਤਰਾਨ ਲੈ ਆਪਣੇ ਅੰਦਰ ਵੱਡਾ ਜਿਹੜਾ ਉਹ ਉਹ ਥਾਗਰ ਨਾਲ ਪ੍ਰੀਤ ਕਰ ਆਪਣੇ ਨਾਲ ਪ੍ਰੀਤ ਵਾੜਾ ਬਣੀ ਉਹਦੇ ਨਾਲ ਪ੍ਰੀਤ ਦਾ ਕੁੱਟ ਲੈਣਾ ਮਾਟੇ ਤੇਰਾ ਨਾਮ ਜਮੂਰੇ ਜੁੜਿਆ ਹੋਇਆ ਹੈ ਨਾ ਮੂਰੀ ਬਣਿਆ ਹੋਇਆ ਹੈ ਇਹ ਜਮਾਵਾਲ ਸੁਖੂਗਾ ਊਰੇ ਲੱਗਿਆ ਆਵਨ ਛੋਟ ਛੋਟ ਤਿਆਰ ਬਣਿਆ ਹੋਇਆ ਹੈ ਬੜੇ ਤੋਂ ਟੱਡ ਕੇ ਦਾ ਕਾਰਨ ਨਾਰਕਾ ਮੈਲਾ ਆਉਂ ਮੇਲ ਕੀਨੇ ਕਰਾਉਣਾ ਨਾਲ ਸਾਥੋਂ ਰਾਮ ਲੈ ਗਿਆ ਨੇ ਮੇਲ ਕਰਾਉਣਾ ਉਹਦੇ ਨਾਲ ਗਿਆ ਲੈ ਲੈ ਕਿਤੋਂ ਉਹਦੇ ਨਾਲ ਮੇਲ ਕਿਵੇਂ ਹੋਣਾ ਉਹਦੇ ਨਾਲ ਫਰੀਦ ਕਿਵੇਂ ਕੌਣ ਤਾਂ ਬਚਾਓ ਹੈ ਉਹ ਰਾਗ ਦੀ ਪੂਰਨ ਜੀ ਆਨੰਦ ਖੁਲ ਲੈ ਕੇ ਬਰੋ ਤਾਂ ਜਾ ਕਰਿਆ ਜਾਨੀ ਉਸ ਦਾ ਬਸਲ ਦਾ ਥਾ ਦਾ ਲੱਗਦਾ ਹੈ ਅਰਮੇ ਦਾ ਠੀਕ ਹੈ ਜੀ ਪੂਰਵ ਪ੍ਰੀਤ ਪੀਰਾਨ ਲੈ ਪ੍ਰਾਣ ਕੀ ਹੁੰਦਾ ਜੀ ਪੂਰਵ ਜੀ ਪ੍ਰੀਤ ਪਹਿਲਾਂ ਪ੍ਰੀਤ ਸੀ ਇਹਦੀ ਨਾਲ ਹੁਣ ਉਹਦੇ ਨਾਲ ਵਿਰੋਧ ਹੋਇਆ ਜਨਮ ਤੋਂ ਬਾਅਦ ਓਕੇ ਹੁੰਦਾ ਜੀ ਅਧੀਨ ਹੋਈਏ ਜਿਹਦੇ ਵੀ ਆ ਸਰਦਾ ਨਹੀਂ ਉਹਦੇ ਪ੍ਰਾਣੀ ਆ ਸੀ ਜਿਹਦਾ ਅਧীন ਪ੍ਰਾਣੀ ਹੈ ਨੀ ਪੈਦਾ ਤੈਅ ਦੀ ਪੈਦਾ ਨਹੀਂ ਆਏ ਠੀਕ ਹੈ ਪ੍ਰਾਣੀ ਤੇਰੇ ਅੰਦਰ ਉਹੀ ਪ੍ਰੀਤ ਲਾ ਅੱਛਾ ਆਪਣੇ ਮੂਲ ਨਾਲ ਪ੍ਰੀਤ ਕਰ ਬਰੀਦ ਆ ਤੇਰਾ ਤੇਰਾ ਹੌਣ ਹੱਥ ਭੇਜਾ ਉਹਦੇ ਨੰਤਰ ਆਲੇ ਨੂੰ ਹੱਥ ਭੇਜ ਦੂਰ ਕਰ ਉਹਦੇ ਅੰਕਾਰ ਚੱਲ ਅੰਤਰ ਆਦਵ ਦੀ ਆਵਾਜ਼ ਦੇ ਨਾਮ ਇੱਕ ਆਪੇ ਪਰਮ ਭੁਲਾਏਨ ਤਿੰਨ ਨੇਹ ਕਿਰਨਾਲ ਨੇ ਆਪਣਾ ਆਪ ਆਪੇ ਸਵਾਲ ਲਿਆ ਆਪਣੇ ਅਕੀ ਆਪਾਂ ਆਪੇ ਸਵਾਰੀ ਹੈ ਜਿਨਾਵਣੇ ਨਾਮ ਲਈ ਬਿਸਕਾ ਦੇ ਸ਼ਬਦ ਰੱਬ ਗਿਆ ਤੇ ਇਹ ਜਬਰ ਲਈ ਇੱਕ ਆਪੇ ਪਰਮ ਨੂੰ ਬੁਲਾਇਆ ਇੱਕ ਆਪੇ ਪਰਮ ਨੂੰ ਲੈਵਲ ਤੇ ਇਹਦੇ ਫਲ ਖਾਮੋਨਾ ਦੇ ਜਿੰਨੇ ਵੀ ਕਨਫਰਮ ਕਾਰਡ ਕੀਤੇ ਨੇ ਅਰ ਪ੍ਰਤੀਸਾਰੇ ਦੇ ਸੋਚਲੇ ਫੰਦਲ ਨਹੀਂ ਖੋਜਿਆ ਉਹਦੇ ਬਾਹਰ खोजਦੇ ਰਹੇ ਬਾਹਰ ਟੋਲੇ ਸਭ ਕੁਝ ਘਰ ਦੇ ਬਾਹਰ ਨਹੀਂ ਬਾਹਰ ਟੋਲੇ ਰਹੇ ਕਲਮ ਕਾਢਦੇ ਦੇ ਅੰਦਰ ਖੋਜ ਲਿਆ ਉਹਨਾਂ ਨੇ ਆਪਣੇ ਸੋਲਿਆ ਪਾਲਿਆ ਜੜੀ ਇੱਕ ਨਹੀਂ ਗੁਰਮੁਖੀ ਬੁੱਝਿਆ ਹਰ ਆਤਮ ਰਾਮ ਇੱਕ ਨਹੀਂ ਸੁਣ ਕੇ ਮੰਨਿਆ ਹਰ ਉੱਤਮ ਕਾਮ ਇੱਕ ਨਹੀਂ ਗੁਰਮੁਖੀ ਆਰਾਧਨਾ ਅਫਰੀਕਾ ਗੁਰਮੁਖਾਂ ਨੂੰ ਸੁਣ ਕੇ 부ਝ ਲਿਆ। ਤੋ ਕਹਿੰਦੇ ਗੁਰਮੁਖ ਨੇ ਜਿਹਨਾਂ ਸੁਣ ਕੇ 부ਝ ਲਿਆ ਸਮਝ ਲਿਆ। ਆਰਾਧਨਾ ਹਰੀ ਹਰਿ ਜਿਹੜਾ ਆਤਮ ਹੈ ਆਪਣਾ ਗੁਰ ਉਹ ਹੀ ਰਾਣ ਬਣਾਲੇ ਨਹੀਂ ਸੁਣ ਕੇ ਬੁੱਝਿਆ ਇਕੱਲਾ ਉੱਤਮ ਕਾਮ ਕੇ ਉੱਚਾ ਲਿਆ ਪਰ ਨੀ ਜੇ ਜਬਾਨ ਆ ਫਿਰ ਉਤਨ ਅੰਤਰੀ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਅੰਦਰ ਆਜਾ ਮੁਫਦੀ ਅੰਦਰ ਪੈਦਾ ਹੋ ਗਿਆ ਗਾਇਆ ਹਰ ਗੁਣ ਨਾਮ ਹਰੀ ਦੇ ਗੁਣਾਂ ਦਾ ਗਾਇਨ ਕੀਤਾ ਹਰੀ ਦੇ ਗੁਣੇ ਨਾਮ ਦਾ ਗਾਇਨ ਗਾਇਨ ਕੀਤਾ ਅੰਦਰ ਹਰੀ ਦਾ ਰੰਗ ਪੈਦਾ ਹੋ ਗਿਆ ਜਿਹਨੇ ਹਰਦੇ ਗੁਣ ਹੈ ਉਹੀ ਨਾਮ ਆਲਟਾ ਆਲਟਾ ਗੋਣ ਨੋ ਠੀਕ ਹੈ ਜੀ ਇੱਥੇ 13ਵੀਂ ਪੌੜੀ ਸਮਾਪਤ ਠੀਕ ਹੈ ਜੀ ਹਾਂ ਜੀ